श्लोक महला पहला सच वर्त संतोष तीर्थ ज्ञान ध्यान स्नान दया देवता क्षमा जप माली ते मानस प्रधान सोछा जड़ी ए बरत लिए सच खाना सच पहल ये सोछा हेदे चित्त सच प्राप्त हो सुच होवे तान सच पाई है फिरदा करो मन पहला साफ करो ਉਹ ਕਿਵੇਂ ਹੋਊਗਾ ਸੰਤੋਖ ਦੇ ਤੀਰਥ ਤੇ ਜਨਾਨ ਕਹਾਂਗੇ ਤੁਸੀਂ ਦੁਖੀ ਰਹੋਗੇ ਮਾਇਆ ਤੋਂ ਸੰਤੋਖੇ ਘਰੇਖਾ ਜੀ ਨੂੰ ਅਸੀਂ ਰਾਮਕਾਰ ਕਹਿੰਦੇ ਆ ਉਹ ਲਕਸ਼ਪੁਣ ਰੇਖਾ ਉਹ ਕਹਿੰਦੇ ਸੀ ਚਾਹ ਗਿਰਦਾ ਰਾਮਕਾਰ ਦੁੱਖ ਲੱਗੇ ਨਾ ਭਾਈ ਇੱਕ ਰਾਮਕਾਰ ਹੈ ਉਹ ਤੋਂ ਬਾਅਦ ਹੀ ਸੀ ਜਦੋਂ ਮਾਇਆ ਦਾ ਵਰਤਣਾ ਵੀ ਹੈ ਇੱਕ ਚਾਹਰੇ ਚ ਰਹਿ ਕੇ ਵਰਤਣ ਛੱਪ ਰੱਖਣ ਵਾਲੇ ਛੱਪ ਰੱਖਦੇ ਨੇ ਪਰ ਉਹਦੇ ਡੰਗ ਤੋਂ ਬਚ ਕੇ ਵੀ ਰਹਿੰਦੇ ਨੇ ਆਇਆ ਲਗੜੀ ਜ਼ਰੂਰ ਹੈ ਇਹ ਤਾਂ ਬਰਤਣਾ ਪਰ ਇਹਦੇ ਤੇ ਭਰੋਸਾ ਵੜੀ ਗੱਲ ਦਾ। ਆਰਾਮਕਾਰ ਦੇ ਵਿੱਚ ਜਿਹੜਾ ਹੀ ਮਾਇਆ ਦੇ ਵਿੱਚ ਵਿਚਰਦਾ। ਗਿਆਨ ਧਿਆਨ ਵਿੱਚ ਲੋ। ਗਿਆਨ ਦੇ ਵਿੱਚ ਜਿਹੜਾ ਧਿਆਨ ਹੈ ਉਹਦੇ ਨੂੰ ਬੁੱਧੂ ਹੋ ਜਾਣਾ ਵਿਚ ਧਿਆਨ ਕਾਲ ਵਿੱਚ ਹੈ। ਧਿਆਨ ਮਾਇਆ ਚ ਨਹੀਂ ਹੈ। ਮਾਇਆ ਦੀ ਕਮਾਈ ਧਿਆਨ ਦੀ ਧਿਆਨ ਜਿਹੜਾ ਹੈਗੇ ਉਸ ਦੇ ਵਿੱਚ। ਗਿਆਨ ਕੀ ਹੈ? ਗਿਆਨ ਸਤਗੁਰੂ ਦਾ ਬੋਝਣਾ। ਉਹ ਜਦੋਂ ਕਾਲੂ ਰਹੋਣ। ਸਤਗੁਰੂ ਦੀ ਸੇਧ ਠੀਕ ਹੋਣੀ ਹੈ। ਉਸ ਤੋਂ ਹੁਣ ਇਹ ਇਸ ਲੋ। ਬੋਲਦਾ ਇਸ ਲੋ ਪਾਣੀ ਨਾਲ ਜ਼ਰੂਰੀ ਉਦੋਂ ਪਾਣੀ ਰੁਕੇ ਨਾ ਤੋਂ ਲਗਿਆ ਹੋਇਆ ਹੈ ਸੱਚੇ ਇਹ ਨਾਲ ਅੱਖੀਂ ਵੇਖਣ ਜੇ ਪਿੱਛੇ ਤੋਂ ਸੱਚੇ ਸੇ ਇਹੋ ਹਨ ਕਾਜੇ ਨੂੰ ਪੱਛੇ ਦਇਆ ਦੇਵਤਾ ਜੇ ਦਇਆ ਹੈ ਉਹ ਆਪੇ ਦੇਵਤਾ ਉਹਨੇ ਦੇਵਤੇ ਦੀ ਕੀ ਲੋੜ ਹੈ ਜਿਹਦੇ ਅੰਦਰ ਦਇਆ ਹੈ ਦਇਆ ਜਾਣੇ ਪਰ ਦਇਆ ਕੀ ਹੁੰਦੀ ਹੈ ਦਇਆ ਜਾਣੇ ਜੀ ਕੀ ਜੀ ਵਰਤਮਾਨ ਦੀ ਉੱਤੇ ਦਇਆ ਕਰੇ ਉਹਦੇ ਜੀਵ ਆਤਮਾ ਨੂੰ ਜਦ ਦੇ ਜ਼ੋਰ ਤੋਂ ਵਰ ਕਟੇ ਖਿਮਾ ਜਪ ਮੰਨੀ ਖਿਮਾ प्यार ਕਬਿਲ, ਪਿਆਰ ਵੀ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਦਾ ਭਲਾ ਕਰ। ਸਰਬੱਤ ਕਬਲ। ਗੁੱਸਾ ਨਹੀਂ ਕਰ ਸਕਦਾ। ਨੋਬ ਨਹੀਂ ਕਰ ਸਕਦਾ। ਕਿਸੇ ਨਾਲ ਵੈਰ ਵਿਰੋਧ ਨਹੀਂ ਕਰ ਸਕਦਾ। ਇੱਕ ਜੇ ਕਿਸੇ ਨਾਲ ਵੈਰ ਵਿਰੋਧ ਤੁਹਾਡੇ ਨਾਲ ਕੀਤਾ ਅਸੀਂ ਨਹੀਂ ਕਰਦੇ। ਇੱਕ ਇਹ ਜੱਫਾ ਵਾਲੀ ਹੈ, ਜੱਫਾ ਵਾਲਾ ਦੀ ਲੋੜ ਨਹੀਂ ਹੈ, ਮਾਲਾ ਚੱਕੀ ਫਿਰਦਾ ਤੂੰ। ਤੂੰ ਬਖਸ਼ ਦੇਣ ਦੀ ਤੁਹਾਡੇ ਚ ਸ਼ਕਤੀ ਨਹੀਂ ਹੈ। ਕੋਈ ਚਲੇ। ਗਲਤੀ ਕਰ ਗਿਆ ਇਹ ਅਗਿਆਦੀ ਇਹ ਗਲਤੀ ਕਰੂਗਾ ਹੀ ਤੇ ਗਿਆਨਵਾਨ ਆ ਮੈਂ ਥੋੜੀ ਗਲਤੀ ਕਰ ਇਹ ਚੁੱਪ ਬੋਲੀ بار-ਬਾਰ ਤੁਸੀਂ ਇਹਨੂੰ ਫਿਰਦੇ ਰਹੂ ਕਿ ਤਾਂ ਰਹਿਣਗੇ ਇਹ ਤੇ ਰੱਖੋਗੇ ਤੇ ਮੋੜ ਆਲੀ ਕਮੌਣੀ ਬੋਲ ਕੇ ਆਲੀ ਇਹ ਗਿਆਨ ਦੀ ਮੋੜਾ ਸਮੋੜੀ ਅਸੀਂ ਨਹੀਂ ਪਈ ਉਹਨਾਂ ਦੇ ਜੇ ਤਾਨੂੰ ਬਾਹਰ ਨੂੰ ਹੂਕੀਓ ਚਰਨਾਂ ਮਾਰੀ ਕੋਬ ਉਸ ਰੈਵਲ ਦੀ ਗੱਲ ਅਸੀਂ ਨਹੀਂ ਕਰ ਸਕਦੇ ਉਹ ਕਦੇ ਆਉਣ ਕਰਦੇ ਰਹਿਣ ਕਬੀਰ ਨੂੰ ਜੇ ਕੁੱਤਾ ਕਹਿੰਦੇ ਨੇ ਉਹ ਕਹਿੰਦਾ ਰਾਮ ਦਾ ਕੁੱਤਾ ਵੀ। ਕਬੀਰ ਕੁੱਕਰ ਰਾਮ ਕੋ ਪਰ ਰਾਮ ਦਾ ਕੁੱਤਾ ਵੀ। ਉਹਨਾਂ ਨੂੰ ਨੇ ਕਿਹਾ ਵੀ ਤੁਸੀਂ ਕੁੱਤੇ ਹੋ। ਉਹ ਕਹਿੰਦਾ ਮੈਂ ਉਹ ਕੁੱਤਾ ਕਹਿੰਦੇ ਨੇ। ਲੈ ਲਉ। ਭਾਣਾ ਨਹੀਂ ਮੰਨਾਂਗੇ ਤਾਂ ਖਿਮਾ ਵੀ ਨਹੀਂ ਅੰਦਰ ਆ ਸਕਦੀ ਹੈ ਜੀ। ਕਿਵੇਂ ਆਊਗੀ? ਆਪਣਾ ਭਾਣਾ ਜਿੱਥੇ ਉਹ ਤੇ ਖਿਮਾ ਕਿੱਥੇ? ਠੀਕ ਹੈ ਜੀ। ਤੇ ਗਿਆਨ ਵੀ ਇੱਥੇ ਔਂਕੜ ਵਾਲਾ ਸੀਗਾ ਇੱਕ ਖਾਸ ਗਿਆਨ ਹੈ ਨਾ ਜੀ ਹਾਂ ਤੇ ਆਨ ਵੀ ਔਂਕੜ ਵਾਲਾ ਹੀ ਹੈ ਠੀਕ ਹੈ ਜੀ ਇਸ਼ਨਾਨ ਵੀ ਔਂਕੜ ਵਾਲਾ ਹੀ ਹੈ ਵੀ ਔਂਕੜ ਵਾਲਾ ਇਹ ਇੱਕੋ ਹੀ ਗਿਆਨ ਹੈ ਇੱਕੋ ਹੀ ਧਿਆਨ ਹੈ ਇੱਕੋ ਹੀ ਇਸ਼ਨਾਨ ਦੂਜਾ ਇਸ਼ਨਾਨ ਨਹੀਂ ਹੈ ਹਾਂ ਵਰਤ ਦਾ ਭਾਵ ਵਰਤ ਰੱਖਣਾ ਤਾਂ ਨਹੀਂ ਹੈ ਵਰਤਣਾ ਹਾਂ ਹਾਂ ਵਰਤਣਾ ਹੁੰਦਾ ਵਰਤ ਰੱਖਣਾ ਖਾਲੋ ਸਾਡੇ ਖਾਣ ਨੂੰ ਪਹਿਲਾਂ ਇਹ ਵਰਤਣਾ अच्छा पर ਇਹਨਾਂ ਨੂੰ ਲੱਗਦਾ ਵੀ ਜਿਹੜਾ ਸੱਚ ਹੈ ਇਹਦਾ ਵਰਤ ਰੱਖਣਾ ਇਹ ਤਾਂ ਫਿਰ ਗੱਲ ਨਹੀਂ ਬਣੀਏ ਨੇ ਨਹੀਂ ਫਿਰ ਤਾਂ हो ਟੁੱਟੇ ਹੋ ਜਾਣਗੇ ਜੇ ਸੱਚ ਦਾ ਹੀ ਵਰਤ ਰੱਖ ਲਿਆ ਇਹ ਵਰਤੋਂ ਵਾਸਤੇ ਵਰਤਾ ਰਹੇ ਹਨਾ ਜੀ ਵਰਤ ਹੁੰਦਾ ਹੀ ਵਰਤੋਂ ਵਾਸਤੇ ਠੀਕ ਹੈ ਜੁਗਤ ਚੁੰਕਾ ਆਪ ਲਾਉਣਾ ਨਾ ਉਹਨੂੰ ਇੱਕ ਦਿਨ ਜਿਨਾਗੇ ਚਾਹੇ ਰੋਜ ਲੱਗੇ ਲਾਈ ਜਾਣ। ਮੈਂ ਥੋੜਾ ਜਿਆਦਾ ਆਪਾਂ ਕਾਲੇ ਤੇ ਚੁੰਕਾ ਫੇਰਾਂ ਦੇ ਕੋਤਾ ਥੋੜਾ ਥੋੜਾ ਕਰਕੇ ਇੱਕੋ ਜੰਨੀ ਗਿਆਨ ਹੋ ਜਾਣਾ। ਇੱਕੋ ਜੰਨੀ ਮੰਨ ਲੈ ਗੋਲੀਆਂ ਉਹਨਾਂ ਲੱਗੇ ਰਹੋ ਕਬੀਰ ਦਾ ਨੂੰ ਰੋਲ ਬਾਤ। ਚਾਹੇ ਥੋੜਾ ਥੋੜਾ ਕਰਕੇ ਪਰ ਲਗਾਤਾਰ ਥੋੜਾ ਥੋੜਾ ਕਰਕੇ ਜੇ ਗਿਆਨ ਉਹਦਾ ਹੋ ਤਵਦਰ ਹੋਗਾ। ਥੋੜਾ ਜਿਹਾ ਮਨ ਮੰਨੇ ਚਾਹੀਦਾ। ਪਰ ਲਗਾਤਾਰ ਚੋਣੇ ਚਾਹੀਦਾ। ਤੇ ਥੋਤੀ ਜਿਹੜੀ ਹੈ ਉਹ ਜੁਗਤੀ ਨਾਲ ਧੋਣਾ ਉਹ ਧੋਣਾ ਕਿਹੜਾ ਮੰਨੂ ਅੱਛਾ ਜੀ ਇਹਦੇ ਜਿਵੇਂ ਭੇਦ ਹੈ ਜਿਹੜੀ ਆਪਾਂ ਲਾਉਂਦੇ ਆ ਉਹ ਉਹਨਾਂ ਨੇ ਹਣ ਧੋਣ ਨੂੰ ਕਹਿੰਦੇ ਨੇ ਠੀਕ ਹੈ ਵੀ ਜੁਗਤੀ ਧੋਣਾ ਮੰਨੂ ਧੋਣ ਦੀ ਜੁਗਤੀ ਕੀ ਹੈ ਸੁਰਤ ਚੌਂਕਾ ਤਿਲਕ ਕਰਨੀ ਹੋਵੇ ਥੋੜਾ ਥੋੜਾ ਕਰਕੇ ਰੋਜ਼ ਚੌਂਕਾ ਲਾਓ ਕਰਕੇ ਰੋਜ਼ ਇਹਨੂੰ ਇਹਦੀ ਲਗਾਤਾਰ ਜਲਗੇ ਰਹੋਗੇ ਥੋੜਾ ਥੋੜਾ ਭਰ ਲੈਣੀ ਰਹੂਗੀ ਅੱਗੇ ਸਾਫ ਹੋ ਇਕੋ ਦਿਨ ਹੀ ਨਸਾ ਹੋ ਜਾਂਦਾ ਠੀਕ ਹੈ ਆਪਾਂ ਤੋਤੀ ਨੂੰ ਵਰਬ ਵਰਤ ਰਹੇ ਆਪਾਂ ਕਿਰਿਆ ਵਰਤ ਕੇ ਅਰਥ ਕਰ ਰਹੇ ਹਾਂ ਠੀਕ ਹੈ ਵੀ ਮਤ ਨੂੰ ਧੋਣ ਦੀ ਯੁਗਤੀ ਇਹੀ ਹੈ ਵੀ ਹੌਲੀ ਹੌਲੀ ਰੋਜ਼ ਥੋੜਾ ਥੋੜਾ ਗਿਆਨ ਲਈ ਜਾਈਏ ਲੱਗੇ ਰਹਿਣਾ ਆਪੇ ਮਤ ਵਰਜੋ ਭਰਮ ਦੂਰ ਹੋ ਜਾਊਗਾ ਥੋੜੀ ਥੋੜੀ ਕਰਕੇ ਦੂਰ ਹੁੰਦੀ ਹੁੰਦੀ ਐ ਕੋਦੋਂ ਅਗਲੀ ਚੱਲਣ ਹੋ ਜਾਂਦਾ ਜੀ ਸੰਤਾਂ ਇਹ ਨਹੀਂ ਹੁੰਦਾ ਠੀਕ ਹੈ ਜੀ। ਭਾਉ ਭੋਜਨ ਨਾਨਕਾ ਵਿਰਲਾ ਤਾਂ ਕੋਈ ਕੋਈ। ਹਾਂ ਭਾਉ ਭੋਜਨ। ਪ੍ਰੇਮ ਦਾ ਭਾਉ ਜਿਹੜਾ ਉਹਦਾ ਪ੍ਰੇਮ ਹੁੰਦਾ। ਭਾਉ ਜਿਹੜਾ ਉਹਨਾਂ ਕੰਨਾਂ ਦੀ ਹੁੰਦਾ ਉਹ ਚਰ ਹੁੰਦਾ। ਪ੍ਰੇਮ ਦਾ ਭੋਜਨ ਵਿਰਲਾ ਕੋਈ ਕੋਈ। ਕੋਈ ਵਿਰਲਾ ਹੀ ਖਾਂਦਾ। ਪ੍ਰੇਮ ਜੇ ਖਾਂਵੇਂ ਤਾਂ ਪ੍ਰੇਮ ਅੰਦਰ ਇਕੱਠਾ ਹੁੰਦਾ। ਤਾਂ ਪ੍ਰੇਮਾ ਭਗਤੀ 'ਚ ਪ੍ਰੇਮਾ ਭਗਤੀ ਹੈ ਗੁਰਬਾਣੀ। ਇਹ ਜੋ ਜਿਹੜਾ ਸਾਨੂੰ ਪ੍ਰੇਮ ਪ੍ਰਾਪਤ ਹੋ ਰਿਹਾ ਉਹ ਪ੍ਰੇਮ ਦਾ ਤਾਂ ਜਮਾ ਹੋਊਗਾ ਜੇ ਪ੍ਰੇਮ ਨੂੰ ਅਸੀਂ ਭੋਜਨ ਬਣਾ ਕੇ ਅੰਦਰ ਜਮ੍ਹਾਂ ਕਰਾਂਗੇ ਸਾਡਾ ਕੱਢਦਾ ਹਰ ਜੂ ਤੇ ਜੇ ਹਰ ਜੂ ਪ੍ਰੇਮ ਆ ਤੇ ਸਾਰਿਆਂ ਨੂੰ ਰੱਖਣਾ ਹੀ ਪਊਗਾ ਜਿਹਦੇ ਨਾਲ ਵੀ ਤੁਸੀਂ ਵਿਰੋਧ ਕਰੋ ਹਰ ਨਾਲ ਵਿਰੋਧ ਕਿ ਉਹ ਵਿਰੋਧ ਕਰਦਾ ਉਹਨੂੰ ਜਾਣਦੇ ਹੀ ਹੈ ਤੇ ਅਸੀਂ ਵੀ ਵਿਰੋਧ ਕਰਦੇ ਆ ਸਾਡੇ ਜਿਹੜੇ ਖੜਕੀ ਰਹਿ ਗਿਆ ਫਿਰ ਕੱਲ ਇੱਥੇ ਖੜੀਏ ਹਾਂਜੀ ਮਹੱਲਾ ਤੀਜਾ ਨੰਮੀ ਨਾਮ ਸੱਚ ਜੇ ਕਰੈ ਤ੍ਰਿਸ਼ਨਾ ਉਚਰੈ। ਦੋਵੇਂ ਦੇਖੋ ਆਰਾਮ ਦਾ ਜਨਮ ਇਹ ਨੂੰ ਬੋਲਦੇ ਕ੍ਰਿਸ਼ਨ ਦਾ ਜਨਮ ਅਸ਼ਟਮੀ ਨੂੰ ਬੋਲਦੇ ਨੇ, ਜਨਮ ਅਸ਼ਟਮੀ ਨੂੰ ਆਉਂਦੇ ਨੇ ਰਿਕ੍ਰਿਸ਼ਤੀ। ਦੀ ਧੂਮੀ ਬਣਾ ਲਈ, ਇਸੇ ਦੇ ਹੋਰ ਵਧਾ ਲਿਆ ਗਾ ਦੂਜੇ ਦਿਨ। ਹਾਂਜੀ। ਉਹ ਜਿਹੜੀਆਂ ਗੱਲਾਂ ਐ ਨਾ ਇਹ ਹੋਈਆਂ ਕਿਉਂਕਿ ਅਵਤਾਰਵਾਦ ਜੋ ਅਸਲ ਦੇ ਵਿੱਚ ਤਾਂ ਵੇਦ ਵਿੱਚ ਆਈਆਂ ਹੋਈਆਂ ਹੁੰਦੀਆਂ, ਇਹ ਦੇ ਵਿੱਚ ਇਹਨਾਂ ਨੇ ਬਣਾਤੀਓ। ਚਲੋ ਪੰਡਤ ਰਿ ਬਾਟ ਪਾੜੀ ਐ। ਇਹ ਅਸ਼ਟਵੀਰੋਬੀ ਨੂੰ ਇਹਨਾਂ ਦੇ ਹੋਰੇ ਰੰਗ ਕੇ ਸਾਰੇ ਅਰਥਾਂ ਦੇ ਅਨਸਤ ਕਰਦੇ। ਵੇਦ ਛੱਡ ਦਿੰਦੇ। ਉਹ ਸਿਮਰਤਿ ਸ਼ਾਸਨ ਲੈ ਆਉਂਦੇ ਉਹਦੀ ਜਗ੍ਹਾ। ਵੇਦ ਪੜਦਾ ਹੀ ਨਹੀਂ ਉਹ। ਹਾਂ, ਨੋਬੀ ਜਿਹੜੀ ਜਿਹਨੂੰ ਕਹਿੰਦੇ ਸਾਹ ਸਿਮਰੋ ਗੋਬਿੰਦ ਲਗਾਤਾਰ ਸੱਚ ਨਾਲ ਜੁੜਿਆ ਰਹਿਣਾ। ਇਹਦੇ ਤਲੇ ਸਾਡਾ ਨੌਮੀ ਨਵੇਂ ਕਹਨ ਵਸਦੇ ਨਹੀਂ ਆਇਆ। ਕਈ ਨਹੀਂ ਕਿਉਂਕਿ ਚਾਰ ਵਾਰ ਆਉਂਦਾ ਏ ਅੱਖਰ ਵੈਸੇ ਆਉਂਦਾ ਨੌ ਵਾਸਤੇ ਇਹ ਸ਼ਾਇਦ ਨੌਮੀ ਨਵੇਂ ਛਿੱਦਰ ਅਪਵਿੱਤ ਹਾਂ ਉਹ ਅਸ਼ਟਮੀ ਦੇ ਬਾਅਦ ਨੂਬੀ ਹੁੰਦਾ ਨਾ ਉੱਥੇ تیر ਥੇਟਾਂ ਦੇ ਵਿੱਚ ਇਹ ਗੋੜੀ ਹੈ ਹਾਂ ਜੀ ਆਪਣੀ ਥਿੱਤੀ ਗੋੜੀ ਚ ਨੌਮੀ ਨਵੇਂ ਛਿੱਦਰ ਅਪਵਿੱਤ ਠੀਕ ਹੈ ਇੱਕ ਜਗ੍ਹਾ ਆਉਂਦੀ ਨੌਮੀ ਨਵੇਂ ਦਵਾਰ ਕੋ ਸਾਧ ਕਬੀਰ ਜੀ ਦੀ ਚਾਉਂਦਾ ਜੀ ਪਹਿਲਾ ਆ ਪ੍ਰਗਟ ਐ ਸਾਧ ਇਹਨਾਂ ਨੂੰ ਗਲਨ ਸਭ ਜਿਹਨਾਂ ਤੇ ਕੰਟਰੋਲ ਗੱਲ ਠੀਕ ਹੈ ਇਹ ਭਗਤ ਕਬੀਰ ਜੀ ਦਾ ਸੀਗਾ ਪਹਿਲਾਂ ਪੰਜਵੇਂ ਪਾਤਸ਼ਾਹੀ ਸੀਗੀ ਗੋੜੀ ਆ ਠੀਕ ਹੈ ਇੱਕ ਜਗ੍ਹਾ ਫੇਰਾਂ ਦਾ ਬਿਲਾਵਲ ਮਹੱਲਾ ਪਹਿਲਾ ਨੌ ਨੌਮੀ ਨਵੇਂ ਨਾਥ ਨਵਖੰਡਾ ਕਟਗੜ ਨਾਥ ਮਹਾਬਲਵੰਡਾ ਹਾਂ ਕਟਗੜ ਨਾਥ ਮਹਾਬਲਵੰਡਾ ਠੀਕ ਹੈ ਜੀ ਆਪਣੇ ਨਾਲ ਜੋੜ ਲਈਦਾ ਇਹ 7 ਨੌਵੀਂ ਦਾ ਅਰਥ ਆਪਾਂ ਨੌਂੇ ਨੌਵੀਂਓ ਕਰਾਂਗੇ ਜੀ ਨੌਵੀਂ ਨੇਮ ਸੱਚ ਜੇ ਕਰੇ ਆਹ ਨੌਵੀਂ ਦੋਬੇ ਵਾਲੇ ਜਨ ਜੇ ਇਹ ਰਾਮਦਾ ਜਨਮ ਹੋਣ ਤਾਂ ਸੱਚ ਨਾਲ ਜੁੜ ਕੇ ਹੋਣਾ ਹੈ ਮੈਂ ਇੱਕ ਰਾਮ ਰੋਮੀ ਆ ਨਾ ਮੈਂ ਦਾਸੀ ਰਾਮ ਨੂੰ ਮੀਟਾਂ ਠੀਕ ਹੈ ਰਾਮਦਾ ਜਨਮ ਤਾਂ ਘੱਟ ਬੋਲੇ ਜਨਮ ਤਾਂ ਉਹਦਾ ਜਰੂਰ ਹੋਣਾ ਇਹ ਤਾਂ ਬੰਦੇ ਆ ਪਰ ਸੱਚ ਨਾਲ ਜੁੜੇ ਬਿਨਾਂ ਕਿਵੇਂ ਹੋ ਲਗਾਤਾਰ ਜਿਹੜਾ ਮਾਇਆ ਨਾਲ ਜੁੜਿਆ ਹੋਇਆ ਹੈ, ਸਰੀਰ ਨਾਲ ਜੁੜਿਆ ਹੈ, ਉਹਦਾ ਜਨਮ ਕਿਵੇਂ ਹੋ ਜੂਗਾ? ਕਾਮ, ਕ੍ਰੋਧ, ਤ੍ਰਿਸ਼ਨਾ ਉੱਤਰੇ। ਤੇ ਕਾਮ, ਕ੍ਰੋਧ, ਤ੍ਰਿਸ਼ਨਾ ਉੱਤਰ। ਕਾਮ, ਕ੍ਰੋਧ, ਤ੍ਰਿਸ਼ਨਾ ਜਿਹੜੀ ਹੈਗੀ ਹੈ ਇਹ ਉਹ ਦੱਸ ਸਕਦਾ ਵੀ ਕੀ ਹੁੰਦੀ ਹੈ। ਕਹਿ ਤਾਂ ਰਹੇ ਨੇ ਕਾਮ, ਠੀਕ ਨਹੀਂ ਹੈ। ਤ੍ਰਿਸ਼ਨਾ ਠੀਕ ਨਹੀਂ ਹੈ। ਪਰ ਛੱਡ ਵੀ ਕੋਈ ਨਹੀਂ ਆ। ਕੌਣ? ਛਡਾਉ ਉਹ ਜਿਹੜਾ ਸੱਚ ਨਾਲ ਜੁੜਿਆ ਹੋਇਆ ਕ੍ਰੋਧ ਸੱਚਣਾ ਤੋੜੂਗਾ ਤ੍ਰਿਸ਼ਨਾ ਸੱਚਣਾ ਤੋੜੂਗੀ ਕਾਮਨਾ ਸੱਚਣਾ ਤੋੜੂਗੀ ਉਹਨੂੰ ਪਤਾ ਹੈ ਸੱਚਣਾ ਜੁੜੇ ਹੋਏ ਨੂੰ ਕਿ ਕਾਮ ਕ੍ਰੋਧ ਔਰ ਤ੍ਰਿਸ਼ਨਾ ਕੀ ਹੁੰਦੀ ਹੈ ਕਿਵੇਂ ਨਾ ਤੂੰ ਤੁਸੀਂ ਖੜਾ ਛਡਾਉਣਾ ਉਸ ਉਚਾਰਨ ਸੁਝਾ ਸਕਦਾ ਦਾ ਸਕਦਾ ਕੋਈ ਤਾਂ ਆਪ ਤ੍ਰਿਸ਼ਨਾ ਨੂੰ ਭੂਰੇ ਰਹੇ ਉਹ ਇਹ ਸਾਰੇ ਕਹਿੰਦੇ ਨੇ ਪਰ ਛੱਡਦਾ ਕੋਈ ਨਹੀਂ ਯਾ ਕੋਈ ਵੀ ਨਹੀਂ ਕਰਦਾ ਹੋਵੇਂ ਤਾਂ ਇਹ ਕਹਿੰਦਾ ਤਾਂ ਹੋਵੇਂ ਬੁੱਝੇ ਤਾਂ ਦਰਸੂਜੇ ਹੋਵੇਂ ਬੁੱਝੇ ਇਹ ਤਾਂ ਬੁੱਝਣ ਵਾਲੀ ਗੱਲ ਐ। ਯਾਨੀ ਸੋਦੇ ਬੁੱਝਣ ਵਾਲੀ ਗੱਲ ਐ। ਫਿਰ ਉਚਾਰਣ ਕਿਵੇਂ ਕਰੂ ਕਹੋ। ਦੇ ਵਿੱਚੋਂ ਹੀ ਸਾਰੇ ਪੈਦਾ ਹੋਏ ਨੇ ਬਾਅਦ ਦੇ ਬੀਜ ਹੋ ਗਿਆ ਹੀ ਹੋ ਵਿੱਚ ਆਇਆ ਹੋ ਗਿਆ। ਲੈ ਕੇ ਹੋ ਆਇਆ ਸੀ। ਇਹ ਤਾਂ ਬਾਅਦ ਚ ਪੈਦਾ ਹੋਏ ਨੇ। ਠੀਕ ਐ ਜੀ। ਉਚਰੇ ਦਾ ਦੱਸੋਗੇ ਉਚਰੇ ਦਾ ਜਿਹੜਾ ਪ੍ਰੋਫੈਸਰ ਸਾਹਬ ਸਿੰਘ ਐ ਉਹ ਚੰਗੀ ਤਰ੍ਹਾਂ ਖਾ ਜਾਏ ਕਹਿੰਨੇ ਉੱਚੜਾ ਖਾਣ ਜਾਣ ਨੂੰ ਖਾ ਜਾਣ ਨੂੰ ਕਹਿੰਦੇ ਆ। ਖਾ ਉਹ ਵੀ ਤਾਂ ਸੋਚ ਵਿੱਚ ਉੱਚੜਾ ਕਿਤੇ ਆਇਆ ਜੀ। ਉੱਚੜਾ ਹੈ। ਬੋਲ ਕੇ ਦੱਸੂ ਸਮਝਾਊਗਾ। ਹਾਂਜੀ। ਉਹ ਸਹੀ ਵਿਆਖਿਆ ਕਰਕੇ ਦੱਸ ਸਕਦਾ ਉਹ। ਕਾਮ ਕ੍ਰੋਧ ਤ੍ਰਿਸ਼ਨਾ ਦਾ ਕੀ ਨੁਕਸਾਨ? ਉਹ ਛਡਾ ਸਕਦਾ ਹਾਂਜੀ। ਉਹਨਾਂ ਦੇ ਔਗਣ ਉੱਚੜ ਕੇ ਦੱਸ ਸਕਦਾ ਤੁਹਾਨੂੰ। ਉਹ ਰਾਮਕਾਰ ਦੀ ਜਿਹੜੀ ਗੱਲ ਪਿੱਛੇ ਕਜੀ ਨਾ। ਆਇਆ ਤਾਂ ਬਿਲਕੁਲ ਭਜ ਨਹੀਂ ਸਕਦੇ। ਪਰ ਕਿੱਥੋਂ ਜਾ ਕੇ ਮਾਇਆ ਕ੍ਰਿਸ਼ਨ ਬਣ ਜਾਂਦੀ ਹੈ ਉਹ ਜਿਹੜੀ ਰਾਮਕਾਰ ਹੈ ਉਹ ਉਹ ਐਕਸਪਲੇਨ ਕਰੂਗਾ ਕਿ ਇੱਥੋਂਵੇਂ ਫਿਰ ਮਾਇਆ ਕ੍ਰਿਸ਼ਨ ਬਣ ਜੂਗੀ ਇੱਥੇ ਤੱਕ ਹੱਦ ਆ ਆਪਾਂ ਮਾਇਆ ਦੇ ਵਿੱਚ ਜਾ ਸਕਦੇ ਹਾਂ ਇਦੋਂ ਗਾਹ ਨਹੀਂ ਜਾਣਾ ਦਰਿਆ ਦੇ ਵਿੱਚ ਗਾਹ ਨਹੀਂ ਜਾਈਦਾ ਹੁੰਦਾ ਕਿਨਾਰੇ ਤੇ ਹੀ ਰਹਿਦਾ ਗਾਹ ਦਾ ਪਾਣੀ ਰੋੜ ਕੇ ਲੈ ਜਾਂਦਾ ਕਿਨਾਰੇ ਤੇ ਹੀ ਸਪ੍ਰੇਡ ਹੁੰਦੀ ਪਾਣੀ ਦੀ ਬਹੁਤਾ ਵਿੱਚ ਨਹੀਂ ਜਾਈਦਾ ਹੁੰਦਾ ਤਾਂ ਉਚਰੇ ਦਾ ਭਾਵ ਆਪਾਂ ਇਹੀ ਲੈਣਾ ਕਿ ਦੱਸ ਰਿਹਾ ਹੈ ਉਹ ਉਪਦੇਸ਼ ਦੇ ਰਿਹਾ ਹੈ ਨੇ ਖਾਲ ਲਈ ਕੀਤੇ ਆ ਉਹ ਠੀਕ ਨਹੀਂ ਲੱਗਦੇ ਅਰਥ ਉਹ ਖਾਲੂ ਆਪੇ ਲੋਕਾਂ ਨੂੰ ਕੀ ਪੈਦਾ ਹੋ ਆਪਣੇ ਦਾ ਉਹ ਗੁਰਮੁਖ ਅਥੇ ਗਿਆ ਦੁਕਾਨ ਤੋਂ ਕਿਸੇ ਨੇ ਆ ਕੋਈ ਦੇਈ ਉਹ ਹੈ ਫਿਰ ਸਮਝ ਦਸੇ ਦੁਆਰ ਜੇ ਠਾਕੈ ਇਕਾਦਸੀ ਇਕ ਕਰ ਜਾਣਾ 10ਵੀਂ ਗੱਲ ਜਿਹੜੀ ਤੁਸੀਂ ਕਹਿਦੇ ਹੋ ਗਾਂ 10ਵੀਂ ਆ ਗਈ 10ਵੀਂ ਨੂੰ ਆਪਾਂ ਸਿੱਖ ਵੀ ਹੁਣ ਬੱਲਣ ਲੱਗੇ 10 ਦੁਆਰ ਦੇ ਠੱਕ 10 ਦੁਆਰ ਲੈ ਦ ਦੇ ਕੋਈ ਨਾਲ ਲੈ ਲਿਆ ਨਾ ਇਹ ਦਿਮਾਗ ਤੋਂ ਨਾ 10 ਦੁਆਰ ਨੂੰ ਠੀਕ ਹੈ ਦੀ ਗੱਲ ਹੈ ਆਪਣੇ ਦਾ ਦੁਆਰ ਦੀ ਗੱਲ ਨਹੀਂ ਹੈ ਆਪਣੇ ਦਾ ਇਹ 10 ਦੁਆਰਿਆਂ ਤੋਂ ਰੋਕਣ ਬੁੱਧੀ ਠੱਕੜੀ ਬੁੱਧੀ ਦੀ ਜੋ ਤੁਹਾਡੇ ਜੀ ਫਿਰ ਵੀ ਛੱਡ ਦੇਣੀ ਆ ਉਹ ਤੇਰੀ ਕੁੜੀ ਦੁਆਰ ਮੰਡੀ ਬੈਠਾ ਲੇ ਉਹਦਾ ਪ੍ਰਚਾਰ ਕਰ ਰਹੇ ਅਸੀਂ ਵੀ ਵਿਦਵਾਨ ਸਾਡੇ ਵੀ ਇਹੀ ਕਹਿ ਜਾਂਦੇ ਇਹ ਦਸੇ ਦਵਾਰਿਆਂ ਤੋਂ ਰੋਕਣਾ ਤੇ ਕੋਈ ਨਹੀਂ ਦੇ ਸਾਰੇ ਦਸੇ ਉਹ ਦਿਮਾਗ ਇਹਨਾਂ ਦਵਾਰਿਆਂ ਨੂੰ ਜੋੜਦਾ ਬਾਕੀ ਜੇ ਪਹਿਲਾਂ ਸੁਰਤ ਦਿਮਾਗੇ ਜਾਂਦੀ ਹੈ ਤਾਂ ਹੀ ਜੁੜਦਾ ਹੈ ਦਿਮਾਗ ਜਲੀ ਜਾਂਦੀ ਫਿਰਦਾ ਹੈ ਸੁੱਤਾ ਹੋਇਆ ਫਿਰਦਾ ਹੈ بے ਹੋਸ਼ ਹੈ ਕਿਸੇ ਦਵਾਰੇ ਨਾਲ ਨਹੀਂ ਜੁੜਿਆ ਹੈ ਮਾਇਆ ਨੂੰ ਜੋੜਦਾ ਦਿਮਾਗ ਠੀਕ ਦਾ ਦਸਾਂ ਦਵਾਰ ਮਾਇਆ ਨੂੰ ਜੋੜਦਾ ਦਸੇ ਦਵਾਰੇ ਛੱਡਦੇ ਨੂੰ ਤੇ ਫਿਰ ਇੱਕ ਆਦਤ ਦਸਾਂ ਦਵਾਰਿਆਂ ਨੂੰ ਇੱਕ ਦਵਾਰੇ ਦੇ ਬੰਦ ਕਰ ਦੇਣਾ ਲਿਜਾ ਕੇ ਫਿਰਦੇ ਨੇ ਉੱਥੇ ਇਹ ਦਸੇ ਦੁਆਰੇ ਉੱਥੇ ਲੈ ਕੇ ਜਾਣੇ ਨੇ ਏਕਾ ਦਸ ਇਹ ਦਸਾਂ ਨੂੰ ਇੱਕੋ ਹੀ ਬਰਾਬਰ ਸਮਝੋ ਤੁਸੀਂ ਜਿਹੜਾ ਤੁਹਾਡਾ ਦਸਕ ਦੁਆਰ ਹੈ ਨਾ ਨੌ ਦੁਆਰੇ ਦੂਏ ਦੇ ਪ੍ਰਗਟ ਦਸਵੇਂ ਗੁਪ 50ਵੇਂ ਦਾ ਗੁਪ ਤਾਂ ਛੋਟੇ ਵਾਲਾ ਵੀ ਗੁਪ ਤਾਂ ਹੈ ਠੀਕ ਹੈ ਜੀ ਦਸਵੀਂ ਦਸੇ ਦੁਆਰ ਜੇ ਠਾਕ ਹੈ ਏਕਾ ਦਸੀ ਇੱਕ ਕਰ ਜਾਣਾ ਇਹ ਕਹਤਾ ਸੀ ਦਾ ਵਰਤ ਰੱਖਦੇ ਰਹਿਣਾ ਹੈ ਇਹ ਕਹਤਾ ਸੀ ਤੂੰ ਬਹੁਤ ਬਹੁਤ ਤਮੰਦਰ ਅਸਲ ਵਿੱਚ ਜਿਹੜਾ ਇਹਦੇ 10 ਦਵਾਰਿਆਂ ਨਾਲੇ 10 ਦਵਾਰਿਆਂ ਨੂੰ ਬਰਾਬਰ ਬੰਦੇ ਉਹ ਪਵਿੱਤਰ ਹੈ ਸਮਝੋ ਠੀਕ ਕਰ ਜਾਣਾ ਠੀਕ ਹੈ ਜੀ ਹਾਂ ਇਹਨਾਂ ਨੂੰ ਬਰਾਬਰੇ ਬੰਦੇ ਸਾਨੂੰ ਠੀਕ ਹੈ ਉਹਨਾਂ ਦੀਆਂ ਥਿੱਤਾਂ ਤੇ ਉਹਨਾਂ ਨੂੰ ਉਪਦੇਸ਼ ਹੈ ਵੀ ਕਾਮ ਨੌਵੀਂ ਤਾਂ ਸਫਲ ਹੈ ਜੇ ਸੱਚ ਕਰ ਕਰੇ ਸੱਚ ਜਿਕਰੇ 10ਵੀਂ ਤਾਂ ਜੇ 10 ਦਵਾਰਾਂ ਚੋਂ ਸੁਰਤ ਨੂੰ ਰੋਕ ਲਿਆ ਜਾਵੇ ਜਾਣ ਤੋਂ तो ਜੇ ਇੱਕ ਕਰ ਲਿਆ ਤਾਂ 11 ਹੋ ਗਈ ਹਾਂਜੀ ਉਹਦੇ 10 ਦਵਾਰਿਆਂ ਨੂੰ ਬਰਾਬਰ ਸਮਝੇ ਆਪ ਕਰਕ ਹੋ ਗਿਆ फिर एक ਹੋਊਗਾ ਜਾਂ ਦਿਮਾਗ ਵੀ ਛੱਡਤਾ ਫੇਰ ਇੱਕ ਹੋ ਆਪੇ ਹੋ ਗਿਆ ਇੱਕ ਠੀਕ ਹੈ ਤ੍ਰਿਗੁੜੀ ਛੱਡਣੀ ਹੈ ਤ੍ਰਿਗੁੜੀ ਦੁਆਦਸੀ ਪੰਚ ਵਸਗਤ ਕਰ ਰੱਖ ਨਾਨਕ ਮਨ ਮੰਨੈ ਅੱਗੇ ਹੋਰ ਚੱਲਿਆ ਗਿਆ 11 ਦੀ ਅੱਗੇ ਦੁਆਦਸੀ ਦੁਆਦਸੀ ਪੰਚ ਵਸਗਤ ਕਰ ਰੱਖ ਇਹ ਜਿਹੜੇ ਅੱਜੇ ਬਕਾਲ ਨੇ ਇਹਨਾਂ ਨੂੰ ਕੰਟਰੋਲ 'ਚ ਰੱਖੇ ਸਾਰਿਆਂ ਨੂੰ ਤਾ ਨਾਨਕ ਮਨ ਬੋਲੈ ਤਾਂ ਗਾਣੇ ਨਾਨਕ ਨੇ ਫੇਰ ਮਨ ਤੁਹਾਡਾ ਬੋਲ ਸਕਦਾ ਫੇਰ ਕਿਤੇ ਬੋਲ ਜਾ ਕੇ ਮਨੁੱਖ ਨਾਲੇ ਪਾਸੇ ਜਾਊਗਾ ਨਹੀਂ ਸੱਚ ਨੂੰ ਬੰਦੇ ਨਹੀਂ ਸਕਦਾ ਇਹ ਕਰਤੇ ਨਹੀਂ ਕਰਦਾ ਉਹਨਾਂ ਦੀ ਦੁਆਸਤੀ ਤੱਕ ਦੀ ਉਹਨਾਂ ਨੂੰ ਦੱਸਤੀ ਤੇ ਦੇਤੀ ਠੀਕ ਹੈ ਜੀ ਤੇ ਉਦੋਂ ਅਗਲੇ ਦੀ ਗੱਲ ਆਪਣਾ ਮਨ ਵੱਧ ਗਿਆ ਕੇ ਆਪਣਾ ਮਨ ਜਿੱਤਿਆ ਗਿਆ ਸਮਝ ਲਓ ਮਨ ਮਨ ਸਾਰ ਬੁੱਧ ਤੇ ਜਦ ਦੂਏ ਦਾ ਬਰ ਵੀ ਤੁਸੀਂ ਜਿੱਤ ਸਕਦੇ ਹੋ ਤੇ ਆਪਣਾ ਜਿੱਤ ਲੈ ਠੀਕ ਹੈ ਜੀ ਐਸਾ ਵਰਤ ਰਹੀਜੇ ਪਾਂਡੇ ਹੋਰ ਬਹੁਤ ਸਿੱਖ ਕਿਆ ਦੀਜੇ ਕਹਿੰਦੇ ਐਸੇ ਵਰਤ ਦੇ ਵਿੱਚ ਰਹਿ ਐਸਾ ਬਰਤਾਓ ਜਿਹੜਾ ਤੇਰਾ ਐਸਾ ਚਾਹੀਦਾ ਜਿਹਦੀ ਸਿੱਖਿਆ ਆ ਠੀਕ ਹੈ ਤੂੰ ਤਾਂ ਹੋਰ ਇਸੇ ਕਹਿ ਦੇਈ ਆ ਜਿਹੜੀ ਤੂੰ ਦੇ ਰਿਆ ਪਾਲਣ ਨੂੰ ਕਹਿੰਦੇ ਇਹ ਦੱਸ ਕਿਹੜੀ ਸਿੱਖਿਆ ਜੋ ਸਿੱਖਿਆ ਕਿਉਂ ਨਹੀਂ ਦੱਸ ਦੱਸਿਆ ਠੀਕ ਹੈ ਚਾਰ ਥਿੱਤਾ ਨਾਲ ਚਾਰ ਸਿੱਖਿਆਵਾਂ ਦੇ ਦਿੱਤੀ ਜੀ 9ਵੀਂ 10ਵੀਂ 11 ਤੇ 12 ਠੀਕ ਹੈ ਐਸਾ ਵਰਤ ਵਰਤਾਰਾ ਜੇ ਹੋਊਗਾ ਇਹੀ ਸਭ ਤੋਂ ਉੱਤਮ ਸਿੱਖਿਆ ਹੈ ਜੀ ਇਹ ਉੱਤਮ ਵਰਤ ਐਸਾ ਹੋਊਗਾ ਤੇ ਅਪਣੇ ਦਸ਼ਵੀ ਦੇ ਜਾ ਕੇ ਖਤਮ ਹੋਇਆ ਦਸ਼ਵੀ ਦਾ ਜਨਮ ਊਮੀ ਤੇ ਲੈ ਗਏ ਫਿਰ ਫਿਲਾਸਫੀ ਆ ਡੇੜੀ ਪਈ ਤੇ ਵਰਤ ਦਾ ਅਰਥ ਆਪਾਂ ਵਰਤ ਜਿਹੜਾ ਰਹਿ ਕੇ ਕਰਨਾ ਉਹ ਨਹੀਂ ਹੈ ਵਰਤ ਦਾ ਮਤਲਬ ਵਰਤਾਰਾ ਹੈ ਤੇ ਵਿੱਚ ਵਰਤ ਲਫ਼ਜ਼ ਦੀ ਨਾ ਉੱਤੇ ਰਾਰਾ ਪੈ ਸਬ੍ਰਤ ਅਲਫਾਜ ਅੱਛਾ ਜੀ ਵਰਤ ਹੁੰਦਾ ਉਹਤ ਜਦ ਰਾਰਾ ਕਰਤਾ ਪੈਰ ਦੀ ਬਜਾਏ ਜਿਵੇਂ ਅਮਰਤ ਦੇ ਵਿਚਾਰਾ ਪੈਰ ਚ ਰੱਖਿਆ ਉਹਨਾਂ ਦੇ ਵੀ ਪੈਰ ਚ ਸਾਡੇ ਵੀ ਪੈਰ ਚ ਹੂੰ ਕਰਤਾ ਲਫ਼ਜ਼ੇ ਬਦਲ ਦਿੱਤਾ ਤਾਂ ਉਹਦਾ ਅਰਥ ਵੀ ਬਦਲਣਾ ਚਾਹੀਦਾ ਠੀਕ ਹੈ ਜੀ ਬ੍ਰਤ ਕਹਿੰਦੇ ਵਰਤ ਨਹੀਂ ਕਹਿੰਦੇ ਉਹ ਹਾਂਜੀ ਵਰਤਨਾ ਹੋਰ ਚੀਜ਼ਾਂ ਬ੍ਰਤ ਹੋਰ ਠੀਕ ਹੈ ਆਪਾਂ ਵਰਤ ਨੂੰ ਵਰਤ ਕਹਿਣ ਲੱਗ ਗਏ ਉਹਦੇ ਨਾਲ ਭਲੇਖਾ ਪੈ ਗਿਆ ਵਰਤ ਲਫ਼ਜ਼ ਦਾ ਅਰਥੇ ਹੋਰ ਹੈ ਬ੍ਰੱਤ ਦੇ ਅਰਥ ਲੈ ਲੈ ਹਾਂਜੀ ਵਰਤ ਚ ਵਰਤ ਦੇ ਅਰਥ ਲੈ ਲੈ ਆ ਹਾਂ ਠੀਕ ਹੈ ਜੀ ਤਾਂ ਇੱਕ ਜਗ੍ਹਾ ਦਾ ਹੀ ਆਪਾਂ ਵਰਤ ਵਰਤਾਰਾ ਲੈਣਾ ਭਗ ਨਾਮਦੇਵ ਜੀ ਦਾ ਹੈ ਨਾ ਪੌੜੀ ਭੂਪਤ ਰਾਜੇ ਰੰਗ ਰਾਏ ਸੰਚੈ ਬਖਮਾਇਆ ਕਰ ਕਰ ਦਰਬ ਚੁਰਾਇਆ ਭੂਪਤ ਦੇ ਭੂਪਤੀ ਜਿਹੜਾ ਕੁਛ ਭੂਖੰਡ ਹੈ ਕੋਈ ਜ਼ਮੀਰ ਉਹਦਾ ਮਾਲਕ ਨੂੰ ਭੂਪਤੇ ਕਿਹਾ। ਉਪਤੀ ਰਾਜਾ ਲੌਂਗ ਜਿਹੜਾ ਪਹਿਲਾਂ ਭੂਪਤੇ ਕਹਿ ਕੇ ਰਾਜਾ ਕਿਹਾ ਕਿਉਂਕਿ ਡਾਇਰੈਕਟਰ ਕੋਈ ਹਰਸ ਬੋਲ ਨਹੀਂ ਰਾਜਾ। ਰਾਜਾ ਗੁਰਬਾਣੀ ਡਾਇਰੈਕਟ ਵੀ ਬੰਦ ਕੀਤੇ। ਉਪਤੀ ਰਾਜੇ ਬੋਲਦੇ ਹੋ ਜਿਹੜੇ ਨੂੰ ਪਤਨ ਕਿਸੇ ਨਾ ਕਿਸੇ ਥੋੜੇ ਬਹੁਤੇ ਜ਼ਬੀਰ ਦੇ ਟੁਕੜੇ ਦੇ ਉੱਤੇ ਕਾਬਜ਼ ਲੇ ਗੋ। ਐਜੇ ਬਹੁਤ ਹਰ ਤਾਂ ਇੱਕੋ ਹੀ ਹੈ ਰਾਜਾ। ਉਪਤੇ ਰਾਜੇ ਰੰਗ ਰਾਇ ਔਰ ਆਏ ਨੇ ਛੋਟੇ ਜਿਹੜੇ ਦੇ ਸਰਦਾਰ ਨੇ ਉਹਦੇ ਨਾਲ ਨੇ ਉਹਨਾਂ ਕੋਲ ਥੋੜੀਆਂ ਪਿੰਡਾਂ ਦੇ ਮਾਲਕ ਬਣਾਏ ਹਲੇ ਵਿੱਚ ਸੱਚੇ ਕੀ ਇਕੱਠਾ ਕਰਦੇ ਮਾਇਆ ਤਾਂ ਬਿਖਾਇਆ ਕਰਦੇ ਆ ਆਇਆ ਇਹ ਜ਼ਾਇਰ ਹੈ ਇਹਨਾਂ ਨੂੰ ਹੰਬੇ ਬਦੂ ਗੋ ਇਹਨਾਂ ਦਾ ਸਭ ਕੁਝ ਬਦੂ ਗੋ ਇਹਨਾਂ ਦਾ ਰੋਗ ਬਦੂ ਗੋ ਫੇਖਾ ਕੇ ਮਰੂਗਾ ਹੀ ਮਰੂਗਾ ਫੇਖਾ ਕੇ ਬਚ ਨਹੀਂ ਸਕਦਾ ਮੌਤ ਵਾਲੇ ਪਾਸੇ ਨੂੰ ਲੈ ਕੇ ਜਾਂਦੀ ਹੈ ਜੀਵ ਸਾਗੀ ਵਾਲੇ ਪਾਸੇ ਨੂੰ ਨਹੀਂ ਲੈ ਕੇ ਜਾਂਦਾ ਓ ਕਰ ਕਰ ਹੇਤ ਵਿਧਾਇਨ ਦੇ ਪਰਦਰਭ ਚੁਰਾਇਆ ਪਰਦਰਭ ਦੂਸਰੇ ਦੇ ਉਤੇ ਕਬਜ਼ਾ ਕਰ ਲੈਣਾ ਕਿਸੇ ਤਰੀਕੇ ਨਾਲ ਵੀ ਦੂਸਰੇ ਦਾ ਤਾ ਮੇਰੇ ਕੋਲ ਕਿਵੇਂ ਆ ਜਾਵੇ ਮਾਇਆ ਨਾਲ ਹੇਤ ਕਰਕੇ ਆਪਣਾ ਦਰਭ ਵਧਾਉਂਦੇ ਭਾਈ ਹੁਕਮ ਅੰਦ ਕਰੂ ਕਿਵੇਂ ਵੀ ਮੇਰਾ ਕੋਲ ਜਿਹੜੀ ਮਾਇਆ ਦੂਜੇ ਦਾ ਵੀ ਜਦੋਂ ਕਰਕੇ ਮੇਰੇ ਕੋਲ ਆ ਜਾਵੇ ਆ ਦੂਜੇ ਨੂੰ ਜਿੱਤ ਲਾਇਆ ਜੋ ਵੀ ਕੁਝ ਕਰ ਲਾ ਆਪਣਾ ਖਿਆਲ ਵਧਾਈ ਜਾਂਦੇ ਪਰਦਰਭ ਚੁਰਾਇਆ ਚਾਹੇ ਚੋਰੀ ਦੂਏ ਦੇ ਦਰਬੂ ਚੋਰੀ ਕਰਦੀ ਖਜ਼ਾਨੇ ਨੂੰ ਚੋਰੀ ਕਰਦੀ ਦੀਤ ਹਰ ਵਕਤ ਧਾਰ ਕੇ ਰੱਖਦੇ ਜਾਂ ਦੂਏ ਰਾਜ ਪਰ ਹਮਲਾ ਕਰਨ ਦੀ ਉਹਨਾਂ ਨੂੰ ਆਪਣੇ ਥੱਲੇ ਲਿਆਉਣ ਦੀ ਹੈ ਜੀ ਇਹਦੇ ਇਲਾਵਾ ਚੁਰਾਇਆ ਤਾਂ ਧਾਰਮਿਕ ਬੰਦਿਆਂ ਨੂੰ ਘੇਰੇ ਰਹੇ ਨੇ ਚੁਰਾਇਆ ਧਾਰਮਿਕ ਬੰਦੇ ਨੇ ਉਹ ਤਾਂ ਧੱਕੇ ਨਾਲ ਲਿਆਉਂਦੇ ਨੇ ਦੂਏ ਤਾਂ ਉਹ ਕਿਸਮ ਦੇ ਰਾਜੇ ਜਿਨ੍ਹਾਂ ਦੇ ਮਗਰ ਬਹੁਤੀ ਸੁੱਖਤ ਜਿਹਨਾਂ ਦੀ ਗੱਲ ਮੰਦੀ ਉਹ ਵੀ ਕਿਸਮ ਦੇ ਰਾਜੇ ਹੀ ਸੀ ਸ਼ਿਵ ਪ੍ਰਾਣ ਆਰ ਵਿਸ਼ਨੂ ਪ੍ਰਾਣ ਦੇ ਰਾਜੇ ਬੜੇ ਹੋਏ ਦੇ अच्छा जी हां जी पुत्र कलतर ना विसरे होना चाहिए जी विस हैं कि विसरे होना चाहिए हां चलो अब जने पुत्र कलतर ਉਹਦੇ ਨੂੰ ਵਿਸਰਦੇ ਲਈ ਹਰ ਇੰਨਾ ਮਤਲਬ ਉਹਨਾਂ ਕਰਕੇ ਮਾਇਆ ਇਕੱਠੀ ਕਰਦੇ ਨੇ ਭਾਈ ਉਹ ਕਰਨਾ ਵਿਆਹ ਕਰਨਾ ਹੈ ਆਪਣਾ ਜਦੋਂ ਪੁੱਤਰ-ਕੁੜਤਾ ਦੀ ਵਿਸਰਦੇ ਨਾ ਆਪਣੇ ਮੂਲ ਨਾਲ ਜੋੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਚਾਈ ਵੀ ਨਹੀਂ ਉਹਨਾਂ ਕੋਲ ਹੈ ਵੇਖਦੇ ਹੀ ਮਾਇਆ ਝੋ ਗਈ ਦੇਖਦੇ ਦੇ ਹੁੰਦੇ ਹੀ ਮਾਇਆ ਜਿਹੜੀ ਹੈ ਕਿੱਢਣੀ ਪੈ ਗਈ ਜਦੋਂ ਜਮਕਾ ਡੰਡਬੂਡ ਮੈਂ ਲਾਦਾ ਸਿਰਵੇਂ ਭਈ ਭਰਾਈ ਪਛੋਤਾਇਆ ਪਛੋਤਾਇਆ ਫੇਰ ਪਛਤਾ ਉਹਦੇ ਨੇ ਪਛੋਤਾ ਉਹਦਾ ਵੀ ਪਛਤਾਉਂਦੇ ਚਲ ਪਹਿਲਾਂ ਸੁਣਦੇ ਰਹੇ ਜਦੋਂ ਭਗਤ ਸਿੰਘ ਕਹਿਆ ਨਾ ਮਾਨੂੰ ਕਿ ਉਹ ਆਪਣ ਪਾਇਓ ਜਿਹੜਾ ਸਿੱਖਿਆ ਦਿੱਤੀ ਸੀ ਹਰਤਾ ਨੇ ਗੁਰੂ ਨੇ ਉਹ ਤਾਂ ਮੰਦੀ ਦੀ ਸੁਣੀ ਨਹੀਂ ਫੇਰ ਕੀ ਫੈਸਲਾ ਕੀਤਾ ਨਾਲ ਕੀ ਬਣ ਅਗਲੇ ਜਨਮ ਵਿੱਚ ਫੇਰ ਦੇਖ ਲਈ ਭਾਈਓ ਵਿਸਰੇ ਕੋਈ ਸ਼ਬਦ ਹੈ ਵੈਸੇ ਵਿਸਰੇ ਤਾਂ ਕੋਈ ਸ਼ਬਦ ਨਹੀਂ ਆਉਂਦਾ ਗੁਰਬਾਣੀ ਚ ਵਿਸਰੇ ਲੱਗਦਾ ਹੈ ਜਿਆਦਾ ਕਿ ਰਾਰਾ ਹਾ ਹਾ ਬਦਲਦਾ ਇਹਨਾਂ ਨੇ ਵਿਸਪਰਟ ਹੀ ਹੋਣਾ ਚਾਹੀਦਾ ਵਿਸੈ ਤਾਂ ਕੋਈ ਸ਼ਬਦ ਹੁੰਦਾ ਅੱਖਰ ਨਹੀਂ ਹੁੰਦਾ ਠੀਕ ਹੈ ਜੀ ਪੁੱਤਰ ਕਲਤਰਨਾ ਵਿਸਰੇ ਬਹੁ ਪ੍ਰੀਤ ਲਗਾਇਆ ਵੇਖਦਿਆਂ ਹੀ ਮਾਇਆਤ ਹੋ ਗਈ ਪਛਤਹਿ ਪਛਤਾਇਆ ਪਛਤਾ ਤਾਪੇ ਕਰਦੇ ਤੇ ਵੀ ਇਹ ਕੀ ਹੋ ਗਿਆ ਸਾਤੇ ਗਲਤੀ ਹੋ ਗਈ ਬਹੁਤ ਬੜਾ ਹੋ ਗਿਆ ਘੜੀ ਆਉਦੀ ਆ ਫਿਰ ਬੋਲ ਕੇ ਵੀ ਨਹੀਂ ਦੱਸ ਸਕਦੇ ਤੋ ਗਈ ਨਾ ਧੋਖਾ ਦੇ ਗਈ ਬਾਯਾ ਤਾਂ ਹੁਣ ਧੋਖਾ ਦੇਣਾ ਹੀ ਹੈ ਬਾਯਾ ਤਾਂ ਜੱਲੀ ਪੈ ਗਈ ਠੀਕ ਹੈ ਜੀ ਪਛਤਾ ਹੈ ਪਛਤਾਇਆ ਜਮਦਰ ਬੱਦੇ ਮਾਰੀਆਂ ਨਾਨਕ ਹਰਪਾਇਆ ਆ ਉਹੀ ਪਰਬ ਦੇ ਜਾਲ ਚ ਮਾਰੀਆਂ ਨੰਬਰ ਵਾਂ ਦੀ ਪਾਸ ਤੇ ਜਮਦਰ ਚ ਪੈ ਰਹੇ ਨੇ ਨਾਨਕ ਹਰ ਪਾਇ। ਜੋ ਆ ਮੈਂ ਕਹਿੰਦਾ ਨਾਨਕ ਨੂੰ ਤਾਂ ਹਰ ਪਾਇ ਅੱਜ ਮੈਂ ਤਾਂ ਆਪਣੇ ਬੋਲ ਨਾਲ ਜੋੜਿਆ ਰਿਆਂ ਮੈਂ ਵੀ ਬਾਹਰ ਜੁੜਿਆ। ਉਹ ਐਸੇ ਕਰਕੇ ਘਰ ਦੇ ਨਰਾਜ ਨੇ ਨਾ। ਠੀਕ ਹੈ ਵੀ ਦੁਹਿਰ ਰਾਜ ਨੇ, ਵਾਲੀ ਵੀ ਨਰਾਜ ਐ, ਸੋਰਾ ਵੀ ਨਰਾਜ ਉਹ ਗੁੱਡੇ ਚੱਕ ਕੇ ਉਹਨਾਂ ਜੋਗੀਆਂ ਦੇ ਚੇਲੇ ਬਣਾਉਂਦੇ। ਚੌਥੇ ਪਾਤਸ਼ਾਹ ਦੀ ਵਾਰ ਆ, ਪਾਤਸ਼ਾਹ ਦੇ ਵੀ ਤਾਂ ਅੱਗੇ ਉਹਨਾਂ ਨੇ ਗੱਲ ਮੰਨੀ ਨਹੀਂ। ਕੋਈ ਗੱਲ ਐ। ਹਾਂ ਜੀ। ਇਹ ਸਾਰਿਆਂ ਨੇ ਹੁੰਦੀ ਹੁੰਦੀ ਐ। ਗੱਲ ਸੁਣੀ। ਜੇ ਤਾਂ ਨੌਵੇਂ ਪਾਸ਼ਾ ਤੋਂ ਬਾਅਦ ਇਹ ਗੱਲ ਬਣੀ ਹੈ ਹੂੰ ਹੂੰ ਤੇ ਪਾਸ਼ਾ ਦਾ ਹੀ ਚਲੋ ਉਸ ਪਾਸ਼ਾ ਇਕੱਲੇ ਹੀ ਸੀਗੇ ਉਸ ਪਾਸ਼ਾ ਦੇ ਚਾਰ ਨੇ ਚਾਰੇ ਪਾਸ ਦੇ ਠੀਕ ਹੈ ਅੱਛਾ ਕੋਈ ਇਹ ਬਸ ਹੈਗਾ ਵੀ ਸਾਰੇ ਪਾਸ ਹੁਣ ਇੱਥੇ 21ਵੀਂ ਪੌੜੀ ਸਮਾਪਤੀ ਹੈ ਜੀ